शलोक मोहल्ला दूजा नानक अंधा होए कह रत्ना परखण जाए रत्ना सार ना जानई आवे आप लिखाई वधावे जी कहन ने भी अन्ना ओ बन्दा परखण जावे रतन बाजार भी मैं पहचान के दूँगा रतन ठीक केड़ा गलत केड़ा रत्ना दी परख कर चले जावे रत्ना ਖਾਲ ਨਾ ਜਾਣੀ ਰਤਨ ਨੇ ਇtanto ਖਬਰ ਦੀ ਹੈ ਔੜੀ ਰਤਨ ਵੀ ਸਮਝ ਤਾਨੂੰ ਆਉਣੀ ਨਹੀਂ ਕਿ ਉਹ ਕੇ ਦੇਖੂ ਨਾ ਉਹ ਦਿਖਣਾ ਤਾਂ ਉਹਨੂੰ ਹੈ ਨਹੀਂ ਆਵੇ ਆਪ ਲਖਾਏ ਲੇਕਿਨ ਗੀਆ ਨੂੰ ਜੂ ਪਤਾ ਆ ਗਿਆ ਜਿਹੜੇ ਗੁਰਬਾਣੀ ਦੀ ਵਿਆਖਿਆ ਕਰ ਰਹੇ ਨਿਰੰਦ ਦੇ ਉਸ ਵੇਲੇ ਵੀ ਕਰ ਰਹੇ ਸੀ ਗੁਰਬਾਣੀ ਦੀ ਗਲਤ ਵਿਆਖਿਆ ਇਹ ਗੁਰਬਾਣੀ ਦੇ ਮੁਕਾਬਲੇ ਤੇ ਗੁਰਬਾਣੀ ਉਚਾਰ ਕਰ ਉਜਾਗ ਕਰਦੇ ਤੇ ਕਿਸੇ ਕਾਤੇ ਪਿੱਛੇ ਬੋਲਦੇ ਸੀ ਕਿ ਉਹਨਾਂ ਨੂੰ ਗੱਲ ਕਹੀ ਹੋਈ ਐ ਅੱਜ ਸਾਡੇ ਵੀ ਇਹਨੇ ਗਿਆਨ ਦੀ ਅੱਖ ਤੋਂ ਉਹਨੇ ਸੱਚ ਪਛਾਣਿਆ ਦੀ ਜੀਹਾਂ ਨੇ ਸੱਚ ਨੂੰ ਜਾਣਿਆ ਨਹੀਂ ਉਹਨੇ ਨੇ ਖਸਮੋਂ ਕੁੱਤੇ ਹੋਏ ਨੇ ਜਿਹੜੇ ਅੱਜ ਤੋਂ ਪੁੱਤੇ ਹੋਏ ਨੇ ਉਹਨੇ ਨੇ ਭੁੱਲੇ ਜਾਂਦੇ ਉਹੀ ਢੀਗਾ ਨੇ ਉਹੀ ਪ੍ਰਚਾਰਕ ਨੇ ਕਹਿੰਦੇ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਐਸੀ ਗੱਲ ਕੋਈ ਨਹੀਂ ਤੇਰ ਸਵੇਰ ਪਤਾ ਲੱਗ ਜਾਂਦਾ ਸਭ ਨੂੰ ਜੇ ਰਤਨ ਦੀ ਪਾਰਕ ਕਰ ਜਾਵੇ ਜੇ ਗੁਰਬਾਣੀ ਦੇ ਪੀਕੇ ਲਿਖਣ ਲੱਗ ਜਵੇ ਪ੍ਰਚਾਰ ਕਰਨ ਲੱਗ ਜਵੇ ਕਿਤਾਬਾਂ ਲਿਖਵਾਰੇ ਉਹ ਪਰਖੇ ਹੁਦਿਅਤ ਨੂੰ ਦੀ ਕੀਤੀ ਉਹ ਜਿਹੜਾ ਹੁੰਦਾ ਆਉਣ ਵਾਲੀ ਪਤਾ ਲੱਗ ਜਾਂਦਾ ਗਲਤ ਇਹਨਾਂ ਨੇ ਕੀਤਾ ਠੀਕ ਨਹੀਂ ਲਿਖਿਆ ਹਾਂਜੀ ਮਹੱਲਾ ਦੂਜਾ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਵਖਰ ਤੈ ਵਣ ਦੋਹਾਂ ਰਹੀ ਸਮਾਈ ਰਤਨਾਂ ਕੈਰੀ ਗੁਥਲੀ ਜਿਹੜੀ ਰਤਨਾਂ ਦੀ ਜਿਹੜੇ ਵਿੱਚ ਰਤਨ ਤੇ ਨਾ ਗੁਥਲੀ ਦੇ ਵਿੱਚ ਜਦੋਂ ਖੋਲੀ ਖੋਲੀ ਕੀ ਨੇ ਜਿਹੜਾ ਜਿਹੇ ਅੰਦਰ ਰਤਨ ਸੀ ਅੰਦਰ ਅਸਲ ਗੁਥਲੀ ਰਤਨ ਮੱਤ ਵਿੱਚ ਰਤਨ ਜਵਾਰ ਮਾਨਕ ਮੱਤ ਵਿੱਚ ਰਤਨ ਜੀ ਨੇ ਗੁਰਮਤ ਲੈ ਲਈ ਰਤਨ ਜਵਾਰ ਮਾਨਕ ਦੇ ਅੰਦਰੇ ਹੋਗੇ ਗੁਣ ਪੈਦਾ ਹੋਗੇ ਜਿਹੜੇ ਗੁਣ ਨੇ ਗੁਰਮਤ ਰਤਨ ਦੇ ਸਾਰੇ ਇਹ ਗੁਣਾ ਦੀ ਗੁਥਲੀ ਜਦ ਖੋਲੀ ਰਤਨਾ ਕੈਰੀ ਰਤਨੀ ਖੋਲੀ ਆਈ ਰਤਨੀ ਜਿਹੜਾ ਰਤਨ ਰੱਖਦਾ ਔਰ ਅਥਰੀ ਰਤਿਆ ਹੋਇਆ ਨੂੰਬ ਦੇ ਰੰਗ ਨਾਲ ਜਿਹੜਾ ਰਤਲੀ ਉਨੇ ਜਾ ਕੇ ਖੋਲੀ ਗੱਲ ਛਾਡ ਵੱਖਰ ਤਾਂ ਵਣ ਜਾ ਰਿਆਂ ਦੋਹਾਂ ਰਹੀ ਸਮਾਈ ਵੱਖਰ ਤਾਂ ਵਣ ਜਾ ਰਿਆਂ ਵਣ ਜਾਦੇ ਵੀ ਖੁਸ਼ ਹੋ ਗਏ ਉਹਨਾਂ ਨੇ ਜਿਨ੍ਹਾਂ ਨੇ ਪਰਖ ਲਈ ਉਹਨਾਂ ਨੇ ਸੀ ਜਿਹੜੇ ਵਣਨ ਨਾਲੇ ਉਹ ਵੀ ਸੰਤੁਸ਼ਟ ਹੋ ਗਏ ਤੇ ਜਿਹੜਾ ਦਨਵਾਲਾ ਜੀ ਉਹ ਸੰਤੋਖ ਹੋ ਗਿਆ ਦੋਇ ਸੰਤੋਖ ਹੋ ਗਏ ਦੋਹਾਂ ਰਹੀ ਸਮਾਇ ਸਮਾਇ ਦਾ ਕੀ ਭਾਵ ਸੀ ਨਾ ਭਟਕਣਾ ਕਿ ਇਹ ਰਤਨ ਜਿਹੜੇ ਆ ਗਿਆਨ ਪਦਾਰਥ ਹੈ ਇਹ ਹਾਂ ਜੀ ਹਾਂ ਜੀ ਨੇ ਜਿੰਨੇ ਸਾਰੇ ਰਤਨ ਵਤ ਵਿੱਚ ਰਤਨ ਜੋ ਆਰਮਾਨ ਸਿੱਖਿਆ ਦੇ ਵਿੱਚ ਰਤਨ ਜਿੰਨੇ ਗੁਰ ਨੇ ਸਾਰੇ ਰਤਨੇ ਨੇ ਹਾਂ ਜਿਨ ਗੁਣ ਪੱਲੇ ਨਾਨਕਾ ਮਾਣਕ ਬਣਜੈ ਸੋਏ ਜਿਨ੍ਹਾਂ ਗੁਣ ਪੱਲੇ ਨਾਨਕਾ ਜਿਹੜਾ ਜਿਹਨਾਂ ਦੇ ਪੱਲੇ ਗੁਣ ਹੈ ਜਿਨ੍ਹਾਂ ਦੇ ਅੰਦਰ ਗੁਣ ਹੈ ਜਿਹਨਾਂ ਨੇ ਗੁਰਬਤ ਧਾਰਨ ਕਰ ਲਈ ਉਹਨਾਂ ਦੇ ਅੰਦਰ ਗੁਣ ਮੋਤੀਆਂ ਦਾ ਵਪਾਰ ਕਰਦੇ ਨੇ ਕੌਣ ਕਰ ਲੂਗਾ ਇਹ ਤਾਂ ਕੌਡੀਆਂ ਦੇ ਵਪਾਰੀ ਨੇ ਜਿਹੜਾ ਜਨਮੋਂ ਮੋਲ ਨਾਲ ਕੌਡੀ ਬਦਲੇ ਜਾਏ ਰੇ ਇਹ ਤਾਂ ਕੌਡੀ ਬਦਲੇ ਦੇ ਰਹੇ ਨੇ ਇਹ ਰਤਨਾਂ ਦੇ ਸਾਰ ਕੀ ਜਾਂਦੇ ਨੇ ਜਿਹੜੇ ਰਤਨਾਂ ਦੇ ਸਾਰ ਜਾਂਦੇ ਨੇ ਉਹ ਕੌਡੀ ਜਨਮ ਹੈ ਨਾ ਜਿਹੜਾ ਅਮਿੱਟੀ ਦੀ ਕੌਡੀ ਮਿੱਟੀ ਦਾ ਜਿਹੜਾ ਬਰਾਬਰ ਰਤਨ ਲੈਂਦੇ ਨੇ ਫਿਰ ਉਹਨਾਂ ਦਾ ਹਾਂਜੀ ਰਤਨਾ ਜਾਣਨੀ ਵਤੈ ਲੋਈ ਜਿਹਨਾਂ ਨੂੰ ਗੁਣ ਦਾ ਪਤਾ ਹੀ ਨਹੀਂ ਹੈ ਰਤਨਾਂ ਅਸਲ ਦੇ ਵਿੱਚ ਤਾਂ ਗੁਣ ਰਤਨ ਨੇ ਆ ਜਿਹੜੇ ਬਾਹਰ ਪੱਥਰ ਇਕੱਠੇ ਕਰਨ ਨਾਲ ਜਿਹੜਾ ਬੂਰਖ ਨੇ ਦੁਨੀਆਵੀ ਲੋਕ ਨੇ ਹੈ ਬਾਦਸ਼ਾਹ ਵੀ ਕਹੋਂਦੇ ਨੇ ਰਾਜੇ ਵੀ ਕਹੋਂਦੇ ਨੇ ਗੁਰਬਾਨੀ ਨਹੀਂ ਫੰਦੀ ਉਹ ਸਿਰਕਾ ਬਾਦਸ਼ਾਹਾਂ ਦੇ ਜਿਹੜੇ ਜਿਸ ਨੂੰ ਬਖਸ਼ੇ ਸਿਰਫਲਾ ਰਾਜ ਦੀ ਬਾਦਸ਼ਾਹੀ ਬਾਦਸ਼ਾਹ ਉਹ ਵੀ ਬਾਦਸ਼ਾਹ ਨੇ ਉਹ ਜਿਹੜੇ ਗੁਣ ਰੂਪੀ ਰਤਨ ਨੇ ਉਹ ਆ ਦੂਏ ਰਤਨਾ ਦੀ ਨਹੀਂ ਉਹਨੂੰ ਕੋ ਲੋੜ ਉਹਨਾਂ ਦੀ ਕੀਮਤ ਇਹਨਾਂ ਦੇ ਖਾਤਰ ਕੁਝ ਵੀ ਪੱਥਰ ਨੇ ਹਾਂਜੀ ਸਹੀ ਕਹਿਣ ਦਾ ਭਾਵ ਇਹ ਹੈ ਕਿ ਜੋ ਬਾਹਰਲੇ ਪਦਾਰਥ ਹੈ ਉਹ ਤਾਂ ਪੱਥਰ ਹੈ ਅੰਨੇ ਲੋਕ ਇਕੱਠੇ ਕਰਦੇ ਉਹਨਾਂ ਨੂੰ ਹਾਂਜੀ ਬਾਹਰੀ ਆਂਦੇ ਬਾਹਰਲੀ ਮਾਇਆ ਨਾਮ ਤਾਂ ਅੰਨੇ ਦਾਸਲੀ ਨਾਮ ਗਿਆਨੀ ਨੇ ਉਹਨਾਂ ਨੇ ਤਾਂ ਤਨ ਮੰਨੇ ਹੀ ਨਾਉ ਨੂੰ ਹੋਰ ਤਾਂ ਹੀ ਕੋਈ ਨਹੀਂ ਦੁਨੀਆ ਨੇ ਦੂਆ ਤਨ ਮੰਨੇ ਅਗਿਆਨੀਆਂ ਨੇ ਅਗਿਆਨੀ ਹੁੰਦਾ ਹੀ ਹੁੰਦਾ ਹੁੰਦਾ ਤਾਂ ਹੀ ਰੂਹੀਏ ਤਾਂ ਅਗਿਆਨੀ ਹੁੰਦਾ ਮੂਰਖ ਵੀ ਹੁੰਦਾ ਸਾਰੇ ਗੁਣ ਹੁੰਦੇ ਨੇ ਅਗਿਆਨਿਕ ਅਗਿਆਨਿਕ ਦੇ ਆਪਣੇ ਗੁਣ ਨੇ ਅਸੀਂ ਉਹਨੂੰ ਔਗਣ ਕਹਿੰਦੇ ਆ ਪੰਡਤ ਦੇ ਹਿਸਾਬ ਨਾਲ ਗੁਣੇ ਨੇ ਪੰਡਤ ਨੇ ਕਹਿੰਦਾ ਰੇਜੋ ਤਮ ਸਤੋ ਜਾਈ ਤਿੰਨੇ ਛੱਡਣ ਨੂੰ ਕੀ ਹੋਇਆ ਤਨ ਖਾਈਏ ਸਾਰ ਕਹਿੰਦੇ ਇਹ ਸਾਰ ਭੋਜਨ ਖਾਣਾ ਨਾ ਇਹ ਤਿੰਨੇ ਗੁਣ ਮਟਾਓ ਮਟਾਈ ਦੇ ਗੁਣ ਹੁੰਦੇ ਨੇ ਮਟਾਈ ਦੇ ਔਗਣ ਹੁੰਦੇ ਨੇ ਔਗਣ ਮਟਾਈ ਦੇ ਨੇ ਗੋੜੀ ਮਟਾਈ ਦੇ पौड़ी, नौ दरवाजे काया कोट है दसवें गुप्त रखीज है बजर कपाट ना खुलनी गुरु खुलीज नौ दरवाजे दे शरीर दे बाहर लेदे अंदर दे काया द हुई है सूक्ष्म शरीर ओदा एक गुप्त दरवाजा है ओ नहीं खुलदा हैगा नौ ਤਾਂ ਆਪਾ ਖੁੱਦੇ ਰਹਨੇ ਆ ਦੋ ਤਾਂ ਖੁੱਲੇ ਹੀ ਨਹੀਂ ਪਰ ਗਰਭ ਦੇ ਵਿੱਚ ਨੌ ਐ ਬੰਦ ਹੁੰਦੇ ਸਰਵਦੇ ਵੀ ਜੇ ਦਸਮਾਹੀ ਖੁੱਲਾ ਹੁੰਦਾ ਜਿੱਥੇ ਸਿਰਸ ਆਉਂਦਾ ਉੱਥੇ ਜਿਵੇਂ ਆ ਉਹ ਦਰਵਾਜੇ ਤੇ ਕਿਉਂ ਪ੍ਰਵੇਸ਼ ਕੀਤਾ ਉਹਨੇ ਜੀਵ ਨੇ ਉਹ ਦਰਵਾਜੇ ਤੇ ਪ੍ਰਵੇਸ਼ ਕੀਤਾ ਮਾਤਾ ਦੇ ਗਰਭ ਚੋਂ ਗੁਪਤਾ ਨੂੰ ਦਿੱਤੀ ਜੀ ਨਾ ਓਏ ਖੋਲਣਾ ਉਹ ਖੋਲਣਾ ਹੁਣ ਹੋਰ ਤਰੀਕੇ ਨਾਲ ਖੋਲਣਾ ਉਹਦੀ ਖੋਲਣਾ ਉੱਥੇ ਦੀ ਬਾਦੀ ਇੱਥੇ ਦੀ ਕੀਤਾ ਬੰਦ ਆਇਆ ਵਾਲਾ ਗੇੜ ਕੀਤਾ ਦੁਆਦ ਕੀਤਾ ਇਹ ਦਰਵਾਜੇ ਨਾਉਂਦਾ ਹੈਗਾ ਹੀ ਨਹੀਂ ਸ਼ਰੀਰ ਤੇ ਦਸਨਾ ਗੁਪਤ ਹੈ ਉਹ ਖੁੱਲਣਾ ਨਹੀਂ ਹੈਗਾ ਕਹਿੰਦੇ ਖੁੱਲੂ ਕਿਵੇਂ ਗੁਰ ਸ਼ਬਦ ਖੁੱਲੀ ਗਿਆ ਉਪਦੇਸ਼ ਨਾਲ ਖੁੱਲਣਾ ਉਹ ਜਦੋਂ ਦਰਵਾਜ਼ਾ ਖੁੱਲਣਾ ਹੈ ਜਿਆਦਾ ਕਰਨੇ ਕਾਹਾਂ ਕਰਨੇ ਅਕਲ ਬੰਦ ਹੈ ਅਕਲ ਬੰਦ ਹੈ ਅਕਲ ਜੇ ਫਿਰਦੀ ਹੈ ਨਾ ਦਵਾਰਾਂ 'ਚ ਫਿਰਦੀ ਹੈ ਮਾਇਆ ਦੇ ਅੰਦਰ ਫਿਰਦੀ ਬਾਹਰ ਨਹੀਂ ਜਾ ਸਕਦੀ ਜਦ ਮਾਇਆ ਤੋਂ ਬਾਹਰ ਜਾਣਾ ਦੱਸਦਾ ਖੁੱਲੂ ਤਾਂ ਮਾਇਆ ਤੋਂ ਪਰੇ ਜਾਊਗੀ ਨਾ ਤਾਂ ਮਾਇਆ ਦੇ ਵਿੱਚ ਖੁੱਲਦੇ ਨੇ ਮਾਇਆ ਦੇ ਵਿੱਚੇ ਬੰਦ ਹੁੰਦੇ ਨੇ ਮਾਇਆ ਦੇ ਵਿੱਚੇ ਖੁੱਲਦੇ ਨੇ ਜਦੋਂ ਮਾਇਆ ਤੋਂ ਪਰੇ ਜਾ ਕੇ ਖੁੱਲਦਾ ਉਹ ਖੋਲਿਆ ਉਹ ਦੂਏ ਲੋਕ ਦਾ ਦਰਵਾਜ਼ਾ ਦੂਏ ਲੋਕ ਹੀ ਲਾਈ ਜਾਂਦਾ ਬਾਰਡਰ ਤੇ ਹੁੰਦਾ ਨਹੀਂ ਉਧਰ ਕੰਦ ਕੀ ਹੈ ਵਿਚਾਲੇ ਗੇਟ ਹੈ ਗੇਟ ਖੋਲਿਆ ਪਾਕਿਸਤਾਨ ਜਾਵਰ ਨਾ ਵਿਚਾਲੇ ਕਿਸੇ ਦੀ ਵੀ ਜੀਵਨ ਹੁੰਦੀ ਲਕੀਰ ਉੱਤੇ ਜੀਰੋ ਇਹਦਾ ਜੀਰੋ ਤੇ ਬੈਠਾ ਜਾ ਕੇ ਨਾਨਕਾ ਬੱਦਾ ਕਰਤਾ ਜਿੱਤੇ ਮਰਤ ਨਾ ਜਨੂ ਇਹ ਜੋ ਵੀ ਜਿਹੜਾ ਨੌ ਦਰਵਾਜੇ ਆ ਇਹ ਕਾਇਆ ਕੋਟ ਦੇ ਨਾਲ ਜੁੜੇ ਆ ਕੋਟ ਜਿਹੜਾ ਹੈ ਉਹ ਦਸਵੇਂ ਗੁਪਤ ਖੀਜੇ ਨਾਲ ਜੁੜਿਆ ਪੜਦੇ ਆਂ ਸਰੀਰ ਤੇ ਆਪਾਂ ਕੋਈ ਕੋਟ ਚਾਰਦਵਾਰੀ ਕੀਤੀ ਬਾਹਰ ਸਰ ਕਿਲਾ ਬਾਹਰਲਾ ਜਿਹੜਾ ਕੋਟ ਹੈ ਇਹਦੇ ਨੌ ਦਰਵਾਜੇ ਨੇ ਇਹ ਨੌ ਤੇ ਲੋੜ ਹੈ ਇਹਨੂੰ ਦੇਖਣਾ ਪੈਂਦਾ ਬਾਹਰ ਮਾਇਆ ਦੇ ਵਿੱਚ ਮਾਇਆ 'ਚ ਦੇਖਦਾ ਮਾਇਆ 'ਚ ਖੁੱਲਦੇ ਨੇ ਨੌ ਦਰਵਾਜੇ ਜੇ ਤਾਂ ਮਾਇਆ ਨਾਲ ਸੁਰਤ ਮਾਇਆ 'ਚ ਜੁੜੀ ਰਹੂਗੀ ਮਾਇਆ ਦੇ ਵਿੱਚੇ ਮਰਦਾ ਇਹ। ਮਾਇਆ ਤੇ ਤੇ ਕਾਲ ਹੈ ਨਾ ਸਰ। ਜੇ ਮਾਇਆ ਤੋਂ ਇਹ ਹੀ ਨਾ ਹੈ ਮਾਇਆਵਲ ਝੱਕੇ ਹੀ ਨਾ। ਤਾਂ ਵੀ ਮਾਇਆ ਦੇ ਨ ਲੋੜਾਂ ਪੂਰੀਆਂ ਕਰ ਦਾ। ਇਹਦਾ ਆਪਣਾ ਨਹੀਂ ਹੈ। ਇਹਨੂੰ ਚਾਹ ਦੇ ਇਸ ਗੱਲ ਦੀ ਸਮਝਣੀ ਹੈ। ਸਰਬ ਕੀ ਚਿੰਤਾ ਜਿਸਮਨ ਮਾਇਆ ਗੱਲ ਕਿਹਾ ਸੀ। ਇਸ ਤੇ ਵਰਤਾ ਕੋਈ ਨਹੀਂ ਕਿਹਾ ਸੀ। ਜੀਵ ਨੇ ਤਾਂ ਕੋਸ਼ਿਸ਼ ਕਰਨੀ ਮੇਰਾ ਦਸਵਾਂ ਜਿਹੜਾ ਗੁਪਤ ਹੈ ਖੁੱਲ ਜਵੇ। ਇਹ ਦਰਵਾਜ਼ੇ ਜੋ ਵੀ ਪ੍ਰਾਪਤੀ ਹੈ। ਸਾਨੂੰ ਪਹਿਲਾਂ ਪਹਿਲਾਂ ਪ੍ਰਾਪਤੀ ਦੋ ਦਰਵਾਜਿਆਂ ਦੀ ਲੋੜ ਹੈ ਅੱਖਾਂ ਦੀਆਂ ਕੰਨਾਂ ਦੀ ਇਹਨਾਂ ਦੋਹਾਂ ਨੂੰ ਆਜਾਤ ਹੈ ਇਹ ਸਰਬਰੋਂ ਮੇਰਿਓ ਸਾਚੇ ਸੁਣਨੇ ਨੂੰ ਪਟਾਏ ਸਾਚੇ ਸੁਣਨੇ ਨੂੰ ਪਟਾਏ ਸਰੀਰ ਲਾਏ ਸੁਣੋਂ ਸਤਿਬੰਦੀ ਪਰ ਕੀ ਅਸੀਂ ਇਹੀ ਕੰਮ ਕਰਦੇ ਆ ਇਹਨਾਂ ਨਾਲ ਇਹ ਦੇਤਰੋ ਮੇਰਿਓ ਔਰ ਤੋਂ ਮੈਂ ਜੋਤਰੀ ਦੇਖੋ ਕੋਈ ਬਾਕੀ ਦਰਵਾਜਾ ਸਰੀਰ ਦੀ ਖਰਾਬ ਜਾਨੀ ਸਰੀਰ ਦੀ ਕਮੀ ਪੂਰੀ ਹੋਣੀ ਉਹ ਇਹਦੇ ਨਾਲ ਸੰਬੰਧ ਹੈ ਮਾਇਰ ਦਾ ਖਾਜ ਹੋਣਾ ਉਹਦਾ ਹੀ ਖਾਣਾ ਸਾਡੇ ਗਿਆਨ ਨਾਲ ਇਹਨਾਂ ਦੋਹਾਂ ਕੀ ਜਾਂਦਾ ਸੰਬੰਧ ਔਰ ਕੋਈ ਸੰਬੰਧ ਨਹੀਂ ਫਲਦੇ ਮਸਲੂਨੀਆਂ ਦੋ ਚੀਜ਼ਾਂ ਦੇ ਸਰੀਰ ਹੈ ਬਾਕੀ ਸਰੀਰ ਦੀਆਂ ਲੋੜਾਂ ਵਾਸਤੇ ਇਹ ਦੋਵੇਂ ਦਰਵਾਜ਼ਿਆਂ ਵਾਸਤੇ ਹੀ ਕਿਹਾ ਆਇਓ ਪੜਨ ਸੁਣਨ ਦੋ ਕੰਨ ਨੇ ਕਰਕੇ ਚਾਰ ਹੋ ਗਏ ਦਰਵਾਜ਼ੇ ਹਾਂ ਬਾਕੀ ਤੇ ਨਾ ਤਾਂ ਸਰੀਰ ਵਾਸਤੇ ਖਾਣਾ ਵੀ ਜ਼ਰੂਰੀ ਹੈ ਨਾ ਲੋੜ ਹੈ ਖਾਣਾ ਫਿਰ ਮਾਇਲ ਦਾ ਖਰਚ ਹੋਣਾ ਇਹ ਤਾਂ ਇਹ ਇਨਲੈਟ ਆਊਟਲੈਟ ਠੀਕ ਹੈ ਜੀ ਹਾਂ ਜੀ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੇ ਵਿਗਿਆਰ ਹੁੰਦਾ ਜਦ ਜੀ ਨੂੰ ਨਹੀਂ ਲੱਗਦੀ ਖੁਫਾਰਦੂ ਇਹ ਤਾਂ ਹੁੰਦਾ ਪਰਮ ਦੇ ਪਰਦੇ ਪਰਮ ਜਿਹੜਾ ਲੋਕ ਤੋਂ ਪਰੇ ਹੈ ਇਹ ਜਦ ਗਿਆਨ ਨੂੰ ਨਹੀਂ ਲੱਗਦੀ ਤੇ ਪਰਮ ਨੂੰ ਨਹੀਂ ਲੱਗਦੀ ਪਰਮ ਵੀ ਪੁਰਾਣਾ ਨਹੀਂ ਹੁੰਦਾ ਜਦ ਆ ਪਰਮ ਦੇ ਵਿੱਚ ਫਸਿਆ ਹੋਇਆ ਹੈ ਪਰਮ ਗੁਰ ਸ਼ਬਦ ਸੁਣੀ ਜਾ ਗੁਰ ਪ੍ਰਦੇਸ ਨ ਖੁੱਲੂਗਾ ਸਮਝ ਆਊਗੀ ਸਮਝਦਾ ਵਿਸ਼ਾ ਹਾਂਜੀ ਅਨਹਦ तुनी ਤੁਨੀ ਵੱਜਦੇ ਗੁਰ ਸ਼ਬਦ ਸੁਣੀ ਜਾ ਤਿੱਤ ਘਟ ਗੁਰ ਸ਼ਬਦ ਸੁਣੀ ਜਾ ਉਹੀ ਗੁਰ ਸ਼ਬਦ ਸੁਣਦਾ ਉਹ ਸਮਝ ਲੋ ਉਹ ਹੀ ਤਰ ਬਾਣੀ ਸੁਣਦੀ ਹੈ ਉਹੀ ਗੁਰ ਸ਼ਬਦ ਹੈ ਗੁਰ ਸ਼ਬਦ ਸੁਣੀ ਉਚਾਰਨ ਕੀਤਾ ਉਚਾਰਨ ਕੀਤਾ ਹੈ ਗੁਰ ਸ਼ਬਦ ਸੁਣੀ ਜਾ ਕਰ ਉਤਰ ਚਾਨਣਾ ਹੁੰਦਾ ਜਿੱਥੇ ਕੁਝ ਵੱਜਦਾ ਉਹ ਸੁਣਦਾ ਉਹ ਪ੍ਰਗਟ ਕਰਦਾ ਉੱਤੇ ਚਾਨਣ ਦਾ ਸਬੂਤ ਹੈ ਜੇ ਚਾਨਣ ਲੋਲਟਣ ਦੇ ਅੰਦਰ ਹੈ ਤਾਂ ਚਾਨਣ ਬਾਹਰ ਵੀ ਹੁੰਦਾ ਜੇ ਬਲਬ ਦੇ ਚਾਨਣ ਅੰਦਰ ਹੈ ਤਾਂ ਬਾਹਰ ਵੀ ਬਖੇਰਦਾ ਹੀ ਹੈ ਚਾਨਣ ਰੱਖ ਨਹੀਂ ਸਕਦਾ ਅੰਦਰ ਬਾਹਰ ਬਖਰਦਾ ਹੀ ਬਖਰਦਾ ਕਦ ਭਗਤ ਮੁਲੀਜਾ ਉਹ ਭਗਤੀ ਕਰਦਾ ਹੁੰਦਾ ਉਹੀ ਭਗਤੀ ਕਰਦਾ ਹੈ ਭਗਤੀ ਕਰਕੇ ਬੁਲੀਜਾ ਮਿਲ ਜਾਂਦਾ ਕੀ ਦੇਣਾ ਸਾਰਿਆਂ ਨਾਲੇ ਮਿਲ ਜਾਂਦਾ ਜਿੱਥੇ ਜੀਵ ਲੋਕ ਪੱਲੋਕ ਦੇ ਸਾਰੇ ਸਾਰਿਆਂ ਨਾਲੇ ਮਿਲ ਜਾਂਦਾ ਉਹ ਸਾਰਿਆਂ ਨੂੰ ਆਪਣਾ ਸਮਝਦਾ ਜਦੋਂ ਪਹਿਲਾਂ ਮਨ ਨੂੰ ਦਾ ਚਿੱਤ ਮਿਲ ਜਾਂਦਾ ਫਿਰ ਜੇ ਇਹਦਾ ਮਨ ਚਿੱਤ ਮਿਲਿਆ ਹੋਏ ਸਭ ਨੂੰ ਮਿਲ ਜਾਂਦਾ ਹੈ ਜੀ ਜਦ ਬੈਰੀ ਬਗਾਨਾ ਹੈ ਹੀ ਨਹੀਂ ਕੋਈ ਠੀਕ ਹੈ ਹੀ ਹੈ ਇਹ ਵਾਕਿਆ ਹੀ ਅੰਦਰੋਂ ਮਿਲਿਆ ਵੀ ਹੋਇਆ ਠੀਕ ਹੈ ਜੀ ਹਰ ਪਿਆਰਾ ਸੋ ਸਭਨਾ ਕਾ ਪਿਆਰਾ ਜੀ ਵਾਹ ਤੋਂ ਕਾ ਪਿਆਰਾ ਜੀ ਸਭ ਮਹਿ ਏਕ ਵਰਤ ਜਿਨ ਆਪੇ ਰਚਨ ਰਚਾਈ ਸਭ ਮਹਿ ਇੱਕ ਵਰਤ ਦਾ ਚ ਇੱਕੋ ਹੀ ਵਰਤ ਦਾ ਵਰਤਦੀ ਹੈ ਸਾਰਿਆਂ ਦੀ ਇਹ ਕੋਈ ਸ਼ਬਦ ਵਰਤਦਾ ਹੈ ਇਹ ਕੋਈ ਉਪਦੇਸ਼ ਵਰਤਦਾ ਹੈ ਸਮ ਰਚਨ ਸਾਰੀ ਰਚਨਾ ਇਹਨੇ ਪੈਦਾ ਕੀਤੀ ਹੈ ਉਹਨੇ ਭੇਦ ਨਹੀਂ ਰੱਖਿਆ ਵੀ ਤੁਹਾਨੂੰ ਕੁਝ ਹੋਰ ਗਿਆਨ ਦੇਤਾ ਉਹਨੂੰ ਕੁਝ ਹੋਰ ਗਿਆਨ ਦੇਤਾ ਤੰਤਰ ਆਤਮਾ ਦੀ ਆਵਾਜ਼ ਸਭ ਦੀ ਇੱਕੋ ਹੀ ਹੈ ਕੋਈ ਉਹਨੂੰ ਸੁਣਦਾ ਕੋਈ ਨਹੀਂ ਸੁਣਦਾ ਕੋਈ ਮੰਨਦਾ ਕੋਈ ਨਹੀਂ ਮੰਨਦਾ ਉਹ ਗੱਲ ਅਲੱਗ ਹੈ ਆਤਮਾ ਅੰਤਰਾਤਮਾ ਦੀ ਆਵਾਜ਼ ਸਾਰਿਆਂ ਚ ਰੱਖੀ ਉਹਨੇ ਪਾ ਕੇ ਸਾਰੇ ਨੂੰ ਸੁਣੇ ਸਾਰੇ ਉਹ ਤੋਂ ਸੇਧ ਲੈਣ ठीक है आपे रचना रचाई तो भाव है वीने अपना शरीर आपे रचया ए गल नहीं ऐसी रचना परमेश्वर ने आप रचाई है के सारेया दे विच यो पाया है अच्छा जी एथे 15वीं पौड़ी समाप्त है जी